शलोक महल्ला तीजा मन प्रतीतना आया सहज ना लगो पाओ शब्द स्वाद ना पायो मन हट क्या गुण गाए ये कंदे ते भरोसा ही नहीं ते भरोसा ही ना करे तो बंधु सहज ठिकानी हो सके ਇਹ ਇਕ ਤਾਲੀ ਹੋ ਸਕਦਾ ਤੌਦਾ ਕੁਰਬਾਨੀ ਉਪਰੇ ਮੈਂ ਗੁਰੂ ਨਾਨਕ ਜੀ ਕਹਿੰਦਾ ਜਦ ਕੁਰਬਾਨੀ ਦਾ ਗੋਟ ਟਿਕਦਾ ਹੈ ਤਾਂ ਕੁਰਬਾਨੀ ਉਪਰੇ ਜੁੜਦਾ ਚਾਰ ਵਾਰ ਖਾ ਲਈਏ ਕਿਸੇ ਵੀ ਚੁਧੀ ਨਹੀਂ ਸਕਦੀ ਹੈ ਤੁਹਾਨੂੰ ਕੋਈ ਟਿਕਦਾ ਜਦ ਅਸਰ ਕਰਦੀ ਕਿਉਂਕਿ ਦੋਗਾ ਅਸਰ ਨਾਲ ਹੁੰਦਾ ਜੀ ਦਾ ਲਾਭ ਹੁੰਦਾ ਕੰਡ ਕਾਹ ਹੁੰਦਾ ਹੈ ਇਹ ਰੂਹ ਦਾ ਸੇਰ ਕੁਰਬਾਨੀ ਦਾ ਪ੍ਰੇਮ ਲੱਗਦਾ ਰੋਠਾ ਵਈਦਾ ਹੈ ਸ਼ਬਦ ਹੈ ਸਵਾਦ ਨਾ ਪਾਇਓ ਮਨ ਹਟ ਕਿਆ ਗੁਣ ਗਾਏ ਸ਼ਬਦ ਜੋ ਸੁਣਿਆ ਉਪਦੇਸ਼ ਉਹ ਜੋ ਆਈ ਸਮਝੇ ਸ਼ਬਦ ਸਵਾਦ ਨਾ ਸਭ ਤੋ ਸਵਾਲ ਨਹੀਂ ਆਇਆ ਉਹ ਜੋ ਰਸ ਨਹੀਂ ਆਇਆ ਰਸ ਮੈਂ ਸ਼ਬਦ ਦਾ ਸਵਾਦ ਨਾ ਪਾਇਓ ਮਨ ਹਟ ਕਿਆ ਗੁਣ ਆਇਓ ਹਾਂਜੀ ਪ੍ਰਾਪਤ ਨਹੀਂ ਹੋਇਆ ਪਾਇਆ ਜੀ ਕੋਈ ਮਨ ਹਟ ਕਿਆ ਗੁਣ ਗਾਏ ਕਰਨਾ 2 ਘੰਟੇ ਕਰਨਾ ਤਾਂ ਹੋ ਰਿਹਾ ਹਾਂਜੀ ਮਾੜ ਡੋਪਤ ਕੁ ਪੁਰ ਦਰਵਾਜ਼ੇ ਸਾਹੇ ਹੋ ਗਏ ਕਿਸੇ ਨੂੰ ਕੋਈ ਦੇਸੀ ਨਹੀਂ ਲਸੋੜ ਵਾਲੇ ਨੂੰ ਰਸ ਹੈ ਨ ਲਖਣਾਉਣ ਵਾਲੇ ਨੂੰ ਰਸ ਹੈ ਜੇ ਰਸੇ ਕੋਈ ਨਹੀਂ ਰਸਾ ਅਰਥਾ ਨਾਲ ਹੋ ਹਾਂਜੀ ਰਸਾ ਵਕਤੇ ਨਹੀਂ ਕਿ ਉਹ ਕਹਣਾ ਅਸਰ ਠੀਕ ਹੈ ਜੀ ਰਸਾ ਨਾ ਦਾ ਰਸ ਵੀ ਆਇਆ ਸੌਂਦਾ ਰੱਖਦੀ ਆਇਆ ਸਭ ਕੰਡ ਰਹਾ ਸੀ ਮੇਰੋ ਜਾਲਾ ਰੱਖ ਕੇ ਪ੍ਰਤੀਤਰੀ ਲੋਕਾਂ ਨੂੰ ਕੁਰਬਾਨੀ ਤੇ ਭਰੋਸਾ ਜੀ ਟੁੱਟਨੇ ਜਾਂਦੇ ਨੇ ਜਵਾਬ ਦਾਗਰ ਵਾਲੇ ਜਾਂਦੇ ਤੇ ਠੀਕ ਹੈ ਅੰਦਰੋਂ ਦਾ ਸੀ ਸਿੱਕੇ ਚੁੱਕਣਾ ਚਾਹ ਲੀ ਉਦੋਂ ਥੋੜੀ ਬੰਦਿਆ ਉਹ ਤਾਂ ਅਸੀਂ ਦੇਖਾ ਦੇਖੀ ਚਲੇ ਜਾਂਦੇ ਨੇ ਕਿਸੇ ਚਲੋ ਬੜੇ ਇਸਤਾਲਮ ਦੇ ਚਾਲ ਨਰੇ ਚੋ ਉਹਨੂੰ ਛਰਮ ਛਰਮੀ ਜਾਂਦੇ ਨੇ ਕੱਟ ਕਰਦੇ ਇਹਦਾ ਗੱਲਾਂ ਨੇ ਲੋਕ ਵਿਚਾਰਾ ਠੀਕ ਹੈ ਜੀ ਨਾਨਕ ਆਯਾ ਸੋ ਪ੍ਰਵਾਨ ਹੈ ਜੇ ਗੁਰਮੁਖੀ ਸੱਚ ਸਮਾਏ ਜਿਹੜਾ ਆਇਆ ਸੋ ਪਰਵਾਨਾ ਨਾਮ ਕੰਨਾ ਉਸ ਦਾ ਪ੍ਰਵਾਨ ਸੰਸਾਰ ਵਿੱਚ ਗੁਰਮਤਿ ਸਾਹਿਬ ਸਮਾਏ ਗੁਰਮੁਖੀ ਵਿੱਚ ਸਾਡੀ ਸਮਾਏ ਸਤਗੁਰ ਦੇ ਨਾਲ ਸਤਗੁਰ ਤਾਂ ਪਹਿਲਾਂ ਹੀ ਸਾਚ ਸੁਆਇਆ ਹੋਇਆ ਹੈ ਸਤਗੁਰ ਦੇ ਪਿੱਛੇ ਪਿੱਛੇ ਜਾਦੇ ਦਰਵਾਜ਼ੇ ਬੂਰੇ ਸੜ ਜਾਂਦੇ ਜਿਹਦੀ ਅੰਦਰ ਜਾਂਦਾ ਨਰਮਤੀ ਸਾਚ ਸੁਆਇ ਮਹੱਲਾ ਤੀਜਾ ਆਪਨਾ ਆਪ ਨਾ ਪਛਾਣੈ ਮੂੜਾ ਆਖ ਦੁਖਾਏ ਮੁੱਢੇ ਕੀ ਹਸਲਤ ਨਾ ਗਈਆ ਅੰਦੇ ਪਿਛੜ ਛੋਟਾਂ ਖਾਏ ਐਡਾ ਮੂੜਾ ਇਹਨੂੰ ਆਪਣਾ ਆਪ ਦੀ ਬਿਚਾਰ ਵੈਸੇ ਜੇ ਕਹੀਏ ਤਾਂ ਅੱਜ ਤੱਕ ਵਾਲੀ ਸਣੀ ਕਿ ਆਪ ਦੀ ਕਿਸੇ ਨੂੰ ਕੁਝ ਦੋਵੇ ਵਿਦਿਆਦੇ ਲੈਵਲ ਤੇ ਘਰ ਬਿਲਕੁਲ ਠੀਕ ਹੈ ਹਾਂਜੀ ਕੁਰਬਾਨੀ ਆਪਣਾ ਆਪਣੀ ਸੀ ਜੀ। ਜੇ ਰਾਜੂ ਜੀ ਨੂੰ ਆਪਣਾ ਆਪ ਦੀ ਪਸੰਦ। ਕੁਰਬਾਨੀ ਕਹਿੰਦੇ ਆਪਣਾ ਆਪ ਨੂੰ ਬੁਰਖ ਪਛੋੜਦਾ ਜੀ। ਇਹ ਤਾਂ ਬੋਲੀਓ ਹੋਰ ਹੋਦੀ ਹੈ ਹੈ? ਕੁਰਬਾਨੀ ਆਪਣਾ ਆਪ ਕਿਸੇ ਹੋਰ ਚੀਜ਼ ਨੂੰ ਬੋਲਦੀ ਹੈ ਅਸੀਂ ਕਿਸੇ ਹੋਰ ਚੀਜ਼ ਨੂੰ ਬੋਲਦੇ ਹਾਂ। ਅਸੀਂ ਵਾਰਲੇ ਸ਼ਰੀਰ ਨੂੰ ਆਪਣਾ ਮੰਨਦੇ ਹਾਂ ਕੁਰਬਾਨੀ ਨਹੀਂ ਬੋਲਦੀ। ਕਿ ਕੋਆ ਦਾ ਫਰਕ ਪੈਂਦਾ। ਬੋਲੀ ਪਦਵਾਨ ਇਸਨੂੰ ਰਹੀ ਹੁੰਦੇ ਕਦੇ ਵੀ ਉਹ ਪੜ ਲਿਆ ਕਿ ਹਰਕਤ ਤੋਂ ਥੱਲੇ ਨਹੀਂ ਉੱਤਰ ਜਿੱਦਾਂ ਇਹ ਗੱਲ ਹਰਕਤ ਤੋਂ ਥੱਲੇ ਉੱਤੇ ਹੋ ਜੂਗੀ ਜਿੱਦਾਂ ਇਹ ਗੱਲ ਵੀ ਦੁਆਮ ਤੇ ਹਰਕਤ ਥੱਲੇ ਉੱਤੇ ਵਿਦਵਾਨ ਪਾਗਲ ਹੋ ਦੀ ਖੋਜੀ ਖੁਸ਼ੀ ਨੂੰ ਉਹ ਕਿਹੜਾ ਆਪਣਾ ਆਪਣਾ ਪਛਾਣਦਾ ਸੀ ਆਪਣਾ ਆਪਣਾ ਪਛਾਣ ਹੈ ਬੂੜੇ ਮੂਰ ਕਾ ਜਿਤ ਆਪਣੀ ਪਛਾਣਦਾ ਆਵਰਾ ਆਖ ਦੁਖਾਏ। ਆਵਰਾ ਆਖ ਦੁਖਾਏ ਹੋਰਾਂ ਨੂੰ। ਤਾਂ ਦਰਸ਼ਨ ਕਰਾਉਂਦਾ ਹੈ ਦੁਆ ਨੂੰ। ਪਰਮਾਤਮਾ ਦੇ ਜੋ ਦਰਸ਼ਨ ਕਰਾਉਂਦਾ। ਕਰਾਉਂਦਾ ਇਹ ਨਾ ਸਾੜੀ ਕਰਾਉਂਦਾ। ਰੱਬ ਦੇ ਦਰਸ਼ਨ ਕਰਾਉਂਦਾ ਆਪਨਾ ਆਪ ਬਿਝਾਣਦਾ ਜੀ। ਆਪ ਹੀ ਤੇ ਨਗਾਰ ਹੈ। ਜਿੱਤੋਂ ਦੇ ਦੇ ਲੋਕਾਂ ਨੂੰ ਦਰਸ਼ਨ ਕਰਾਉਂਦੇ। ਆਪਨਾ ਆਪ ਦੇ ਸੋਧੀ ਕੀਤੇ ਐ। ਆ ਤਾਂ ਦਰਸ਼ਨ ਕਰਦੀ ਹਾਇ। ਅਸਲ 'ਚ ਆਤਮ ਦਰਸ਼ਨੇ ਹੋਣਾ ਲੋਕਾਂ ਨੂੰ ਦਿਖਾਇਆ ਜਾਂਦਾ। ਜੋ ਲੋਕਾਂ ਨੂੰ ਦਿਖਾਇਆ ਉਹਰਾ ਕੋ ਦਿਖਾਇਆ ਤਾਂ 12 ਦਿਖਾਇਆ ਤਾਂ ਬਾਲੀ ਅੱਖ ਨਾਲ। ਅੱਖ ਨਾਲ ਦਿਖਾਣਾ ਚੀਜ਼ ਹੋਣੀ। ਇਹ ਧਰਮ ਤੇ ਡੋਕਟਰ ਬਲੈਕਮੈਲਿੰਗ ਫਰਾਡ ਹੈ। ਕਿਸੇ ਫਰਾਡ ਨੂੰ ਜਿਹੜਾ ਉਹ ਨਾਲ ਲੋਕ ਪਰਦੇ ਵਿੱਚ। ਸਾਰੇ ਬੁੱਧਾ ਬੁੱਧਾ ਤਾਂ ਨਹੀਂ ਲੱਗ ਜੇ ਸਾਰੇ। ਤਾਰੇ ਇਹ ਨਹੀਂ ਠੁਠਿਆ ਚੈਨਲਾਂ ਦੇ ਚੱਲਦੇ ਨੇ ਸਭ ਤੋਂ ਬਾਟੋਂ ਗਿਆ ਦੀਆਂ ਫਤਿਹ ਦੀ ਲੋਕਾਂ ਨੂੰ ਦਰਸ਼ਨ ਕਰਾਉਂਦੇ ਨੇ ਉਸ ਬੋਲ ਕੇ ਇਕੱਠੇ ਕਰਦੇ ਨੇ ਲੋਕਾਂ ਦਾ ਕਾਲ ਵੇਸ ਕਰਦੇ ਨੇ ਜਿੱਦਾਂ ਨੁਕਸਾਨ ਕਰਦੇ ਨੇ ਲੋਕਾਂ ਦੇ ਆਸਰਾ ਦੇ ਜਨਰਾਂ ਕਿੰਨੇ ਜੱਲ ਬਸ ਫਰਕ ਕਰਦੇ ਨੇ ਇਹ ਕੀ ਹੋ ਰਿਹਾ ਕਰ ਰਿਹਾ ਹੁੰਦਾ ਫਰੌਡ ਸਰੋਂ ਨੂੰ ਕੁੱਤੀ ਲੋੜ ਲਈ ਹੈ ਕਿਤੇ ਜਾਨ ਦੀ ਅਲੀਵਿੰਗ ਦੇ ਕਾਜੇ ਵਸ ਕਿਤੇ ਘੰਟਾ ਆਇਆ 2 ਘੰਟੇ ਪ੍ਰਚਾਰ ਕਰਦੇ ਵੇ ਘਰ ਬਸੇ ਸਾਰੇ ਸੁਣਦੇ ਕਿਤੇ ਕਿਤੇ ਪਾਸੇ ਦੀ ਵੀ ਰੋਲ ਦਾ ਗਿਆਨ ਦਾ ਵੀ ਸਾਰੇ ਗੁਰਦੁਆਰੇ ਬੰਦ ਸਾਰੇ ਮੰਦਰ ਬੰਦ ਸਾਰੇ ਟ੍ਰਿਕ ਬੰਦ ਕਿ ਕਾਜ ਜਿਹੜਾ ਜਾਣਦਾ ਹੋਵੇ ਤੇ ਦੋ ਪਰ ਦੋ ਹੀ ਘੰਟਾ ਘਟਾ ਇਹ ਆ ਉਹ ਥੋੜਾ ਪੜਾਈ ਹੈ ਵਿਆਖਿਆ ਕਰਦੇ ਮਿਹਰਬਾਨੀ ਇਹਨਾਂ ਸੁਣਾ ਸੁਣਾ ਨਹੀਂ ਜੀ ਕਿਤੇ ਜਾਣੀ ਦਾ ਲੋੜ ਨਹੀਂ ਉਹ ਜਾਣਾਂ ਦਾ ਜਿਹੜਾ ਸਮਾਂ ਬਥੇਰਾ ਭਟਕਦਾ ਹੋਰ ਭਟਕਾਉਂਦੇ ਨੇ ਬਾਹਰ ਪਜਾ ਕੇ ਅਵਰਾ ਆਖ ਦੁਖਾਏ ਹੈ ਆਖ ਦਿਖਾਏ ਜੀ ਦਿਖਾਏ ਹੋ ਦੁਖਾਏ ਰਹਿ ਗਏ ਨੂੰ ਕਹਿ ਕੇ ਦੁਖ ਦੁਖ ਦਿੰਦਾ ਇਸ ਤਰ੍ਹਾਂ ਉਹ ਘੋਰਾ ਨੂੰ ਕਹਿ ਕੇ ਦਿਖਾ ਰਿਹਾ ਨਹੀਂ ਨਹੀਂ ਨਹੀਂ ਧੁੱਕ ਕੀ ਦਿੰਦਾ ਕਿਉਂਕਿ ਇਹ ਨੂੰ ਕੀ ਦਿੰਦਾ ਕਿਉਂਕਿ ਇਹ ਦੁਖਾਏ ਲਿਖਿਆ ਵੈ ਲੋਕਾਂ ਰੱਬ ਦੇ ਅੱਛਾ ਸਾਰੀਆਂ ਬੱਤਾਂ ਕਰਉਂਗੀ ਮੈਂ ਰੱਬ ਦੇ ਦਰਸ਼ਨ ਨਹੀਂ ਕਰਾਂਗੀ ਉਹ ਗਈ ਹੱਤਕਾ ਠੀਕ ਹੈ ਜੀ ਜੇ ਕੋ ਵਾਸਤੇ ਕੋਈ ਨੇ ਦੇ ਵੀ ਜਾਨਾ ਸਰਬ ਦੇ ਚੋਖਵਾਸੇ ਤਾਂ ਫਿਰ ਲਿਖੇ ਜਾਂਦੇ ਆ ਪਾਇ ਲਫਜ਼ ਲਿਖਿਆ ਦੁਖਾਏ ਲਿਖਿਆ ਫਿਰ ਅਰਥੀ ਦਾ ਦਿਖਾਏ ਹੋਏ ਜਿਸ ਆਪਣਾ ਕੋ ਦਿਖਾਏ ਕਿ ਪਸਤਾ ਆਪਣਾ ਆਪੇ ਸ਼ੁਕਰਗੁਜ਼ਾਰੀ ਦੀ ਆਦੀ ਵਿਗਿਆਨੂ ਦਮਾ ਦਹਾਇਆ ਉਹ ਦੀ ਸੰਪਾਨੇ ਦਰਸ਼ਨ ਕਰ ਲੋ ਠੀਕ ਹੈ ਜੀ ਸੰਪਾਨੇ ਦਰਸ਼ਾਣਾਂ ਦਾ ਟਾਈਮ ਉਹ ਦੁਨੀਆ ਕੇ ਆਉਂਦੀ ਹੈ ਪੂਜਾ ਪੈਸੇ ਅੱਖੀਆਂ ਮੱਥਾ ਦੇਖਦੀ ਹੈ ਕਿਦੇ ਸ਼ਰੀਰ ਦੇਖਦੀ ਹੈ ਸ਼ਰੀਰ ਤਾਂ ਫਿਰ ਤੋਂ ਵੇਖ ਲਈ ਤੂੰ ਆਪਣਾ ਆਪ ਦੇਖ ਲੈਂਦਾ ਤਾਂ ਤੁੱਕਾ ਦਰਸ਼ਨ ਕਰ ਲੋ ਠੀਕ ਵਾਹ ਠੀਕ ਹੈ ਜੀ ਇਹਨਾਂ ਮਤਲਬ ਦੁਖਾਈ ਦੀ ਜਗ੍ਹਾ ਦਿਖਾਈ ਹੋਣਾ ਚਾਹੀਦਾ ਦਿਖਾਇਆ ਨਹੀਂ ਜੀ ਦਾ ਠੀਕ ਹੈ ਜੀ ਲੋਕਾਂ ਨੂੰ ਦਰਸ਼ਨ ਮੰਦਾ ਆਪੇ ਦਰਸ਼ਨ ਦੇ ਰਿਹਾ ਲੋਕਾਂ ਨੂੰ ਹੂੰ ਹੂੰ ਕੇ ਜੀ ਜੀ ਦੇ ਦਰਸ਼ਨ ਫੋਟੋ ਦੇ ਦੇ ਦਰਸ਼ਨ ਕਰਾ ਰਿਹਾ ਜਿਹੜਾ ਧਰਮ ਬਣਿਆ ਨਾ ਧਰਮ ਸੱਚਾ ਜੇ ਤਾਂ ਸੱਚਾ ਤਾਂ ਤਾਂ ਉਹਦੀ ਸੱਚੀ ਖਸਨਤ ਸੱਚੀ ਇਹ ਬੜਿਆਨੀ ਫਰਾਉਂਡ ਦੇ ਸਰਤੇ ਹੋਇਆ ਹੋਇਆ ਅਰਵੇ ਫਰਾਉਂਡ ਦੇ ਬੇਸ ਤੇ ਬਣਿਆ ਪਹਿਲਾਂ ਹੀ ਪਤਾ ਹੈ ਜਿਵੇਂ ਬੜਬਾਣੀ ਕਹੇ ਅਦਮ ਚਟਾਲ ਦੀ ਕੋਈ ਬ੍ਰਾਹਮਣੀ ਸ਼ੁੱਧੀ ਤੇ ਸ੍ਰੇਸ਼ਟਾ ਹੀਰੇ ਅੱਧੀ ਸ਼ੁੱਧੀ ਅੱਧੀ ਸ੍ਰੇਸ਼ਟਾ ਹੀਰੇ ਹਾਏ ਅੱਧੀ ਸ਼ੁੱਧੀ ਅੱਧੀ ਨਾਲ ਕੰਮ ਕਰਨ ਕੰਮ ਕਰ ਇਹ ਗੁੰਡ ਨਹੀਂ ਜਾਂਦਾ ਨਾ ਠੀਕ ਹੈ ਜੀ ਕੱਲ੍ਹ ਝਾਲੇ ਅਸੂਨ ਫਰਨਵਾਸ ਤੇ ਲਾਇਆ ਹੈ ਮੇਰਾ ਇੱਕ ਗੋਬਾ ਵਾਸਤੇ ਸੀ ਬਣਾਇਆ ਲੋਕਾਂ ਨੂੰ ਕਬੀਰ ਢੇੜਾ ਚਰਚਰਾ ਟੁੱਕੇ ਛੇਕ ਹਜ਼ਾਰ ਹਜ਼ਾਰ ਛੇ ਦਾ ਢੇੜਾ ਸਾਡਾ ਸਾਨੂੰ ਪਤਾ ਇਹਨੇ ਛੇਕ ਨੇ ਅਸੀਂ ਲੱਗ ਕੇ ਲੋਕਾਂ ਨੂੰ ਸਪੂਤਰ ਦੇ ਵਿਚਾਲੇ ਜਾ ਕੇ ਡੋ ਰਹੇ ਹਾਂ ਤਕਰੀਬਾ ਝਾਂਰ ਨੇ ਆ ਮਿਲਣਾ ਇਹ ਗੁੱਡੇ ਜੀ ਸੋਸਲਤ ٹھیک ہے مڈے دی کھسلت نا گئیے آندے وچوڑ چوٹاں کھائے او گماں چلی ہو ادوس کی میں چلی ہو گڈے دی کھسلت کی ہے سرپڑی ਜਿਹੜੀ ਦੌਰ ਮਾ ਸਾਹਿ ਸਰਪੜੀ ਦਾ ਉਤਾਰ ਹੈ ਉਸ ਨੂੰ ਵਿਧਮ ਜਿਨਾਲੀ ਪਈ ਬ੍ਰਾਹਮਣੀ ਮੰਨੀਆਂ ਪਾਲਦੀ ਹੈ ਪਾਲ ਕੇ ਫਿਰ ਖਾਲੰਦੀ ਹੈ ਹਾਂਜੀ ਵਿਛੜ ਚੋਟਾਂ ਖਾਏ ਵਿਛੜ ਚੋਟਾਂ ਖਾਏ ਜੋੜਨਾ ਖਾਣੀ ਹੋਈ ਵਿਛੜ ਕੇ ਅਜਿੱਤੇ ਚੋਟ ਖਾਣੀ ਹੋਵੇ ਵਿਛੜ ਕੇ ਇੱਥੇ ਜਾਏ ਆਪਣੇ ਖਾਣੇ ਦੇ ਠੀਕ ਹੈ ਜੀ ਸਤ ਕੇ ਪੈ ਪੰਨ ਨਾ ਘੜਿਓ ਰਹੇ ਅੰਕ ਸਮਾਇ ਫੈਲੀ ਮਤ ਭੱਡੀ ਵੀ ਹੈ ਭੱਡੀ ਆਂਦੇ ਕੇ ਘਾੜੀ ਸੀ ਇਹ ਦਰਮਦ ਦਾ ਭੈੜੀ ਘੜੀ ਹੋਈ ਮਤ ਘੜੀ ਜੁਵਨ ਵੀ ਸ੍ਰੀ ਗੁਰ ਇਹ ਬੜਿਆ ਵੱਲ ਰੱਬ ਰੂਪ ਭੱਦੀਆ ਬਣਾਉਣਾ ਤੁਸੀਂ ਹੱਜ ਦਾ ਉੰਡੀ ਚਾਲਬਸ ਸਟ੍ਰੈਸ ਤਾਂ ਪਹਿਲੇ ਮਦਦ ਨੂੰ ਭੰਦ ਦੇਓ ਚਾਹੇ ਕੋਈ ਵੀ ਹੋਰ ਵੱਤੋ ਬਿਨੂ ਹੋਰ ਮਦਦ ਨੂੰ ਭੰਦ ਦੇਓ ਫੁੱਟੜੀ ਉਹਦੀ ਏ ਜਿੱਤੋਂ ਖਰਾਬ ਹੋ ਤੇ ਫੁੱਟੂ ਉਹ ਤੋਂ ਫੁੱਟੋ ਜਿੱਥੋਂ ਦੁਖਦਾ ਹੋਰ ਮੱਤੇ ਜੋਟਾਂ ਪੈ ਰਹੀਆਂ ਨੇ ਹੁਣ ਜਿਹੜੀ ਸਾਡੇ ਕੋਲ ਹੈ ਰੋਜ਼ ਪੈ ਰਹੀਆਂ ਹਨ ਰੋਜ਼ ਘੰਟ ਚੱਲਦੇ ਨੇ ਥੋੜੇ ਚੱਲਦੇ ਨੇ ਭੰਨ ਰਹੇ ਆ ਅਸੀਂ ਇਹਨੂੰ ਕੱਢਣ ਵਾਸਤੇ ਪੈਰ ਦੇ ਵਿੱਚ ਪੱਦੀ ਜਾਊ ਗੁਰੂ ਕਾ ਪੈਰ ਮੁਟਕੇ ਗੁਰਬਾਣੀ ਦਾ ਪੈਰ ਦੇ ਵਿੱਚ ਗੁਰਬਾਣੀ ਛੱਡ ਦੂਗਾ ਤੇ ਅੱਗ ਦੂਗਾ ਠੀਕ ਕਰ ਲੂਗਾ ਮੁਕਤ ਠੀਕ ਹੈ ਜੀ ਰਹੇ ਅੰਕ ਸਮਾਏ ਭੰਗੇ ਘਰਨੇ ਆ ਪਰ ਆਇਆ ਅਬ ਦਸਮਾਏ ਜੇ ਘਰਵੇਂ ਇਥੇ ਸਮਲਾਇਆ ਨਾ ਰਿਹਾ ਉਹਦੇ ਵਿੱਚ ਠੀਕ ਹੈ ਜੇ ਤਾਂ ਉਹ ਫੱਟਾ ਹੋਈ ਬੱਸ ਤਾਂ ਇਹ ਤਾਂ ਦੋ ਜੀ ਜਿਆ ਸਹਿਸਾ ਕਦੇ ਨਾ ਚੁੱਕੇ ਬਿਨ ਸ਼ਬਦੈ ਦੁਖ ਪਾਏ ਅੰਧੇਨ ਸਹਿਸਾ ਕਦੇ ਨਾ ਚੁੱਕੇ ਇੱਤਹਾਸ ਜੇ ਦੁਬਾਰਾ ਲਿਖਣਾ ਤਾਂ ਐਮਪੀ ਦਾ ਸਾਕਾ ਕਰੂਗਾ। ਫਿਰ ਕਿਹਬ ਦੇ ਦੁਖ ਪਾਏ। ਦੁਖ ਕਹੇ ਉਹ ਗੁਰਮਾਹਲ ਦੇ ਉਪਦੇਸ਼ ਨੂੰ ਸੱਤੇ ਸੁਣਾਈ ਜਾਂਦੇ ਨੇ ਇਹ ਗੁਰਦਾਰੀਆਂ ਬਾਰੇ। ਸਭ ਤੋਂ ਵੱਡਾ ਅਪਰਾਧ ਜਿਹੜਾ ਨੇ ਕੀਤਾ ਗੁਰਦਾਰੀਆਂ ਬਾਰੇ ਨੂੰ ਯਾਸ ਦੇਤੀ ਪਰ ਨਹੀਂ। ਇਹ ਅਬਰਾਜ਼ ਕੀਤਾ ਸੀ। ਪਰਾਇ ਦੀ ਲੋਗ ਰਿਆ ਨੇ। ਵੇਹੋਂ ਮੇਰਾ ਨਾਰਦ। ਇਸਲਾਮ ਦੇ। ਰਜਿਸਟਰ ਵਗੈਰਾ ਸਾਰੇ। ਉਹਨਾਂ ਰਾਜੋ ਕਰਵਾ ਸੀ। ਰਾਜ ਕਾਮੋਸਾ ਦੇ ਠੀਰ ਬਲੀਆਂ ਰਾਮ ਰੀਆਂ ਇਕੱਠੇ ਹੁੰਦੇ। ਇੱਕ ਜਗ੍ਹਾ ਇੱਕ ਪਲੇਟਫਾਰਮ ਉੱਤੇ। ਛਿੱਪੀ ਛਿੱਪੀ ਮੁਸਲਮਾਨਾਂ ਨੂੰ ਪਾੜੇ ਤਾਂ ਰਾਜ ਕਰ ਸਕਦੇ ਸੀ। ਉਹਨਾਂ ਦੀ ਆਪਣੀ ਪ੍ਰੋਬਲਮ ਸੀ। ਉਹਨਾਂ ਦੀ ਬਰ ਹੋਣਾ ਆਪਣੀ ਪ੍ਰੋਬਲਮ। ਕਿ ਛੇ ਉਹ ਵਾਲੀ ਤਾਂ ਉਹਨੇ ਖਲਮੇ ਬਾਕੀ ਵਾਲੀ ਬਾਹਰ ਕੱਢ ਦੇ। ਇਹ ਦਾਸੇ ਬਣਉੜੀ ਸੀ ਜਿਹੜੀ ਸਾਡੇ ਕੋਲ ਬਾਕੀ ਵਾਲੀ ਕਹਿੰਦਾ ਮਾਰ ਕੇ ਅੱਜ ਪਤਾ ਲੱਗ ਜਵਾਬ ਗਿਆ ਨਾ ਤੇ। ਬਾਕੀ ਵਾਲੀ ਬਾਹਰ ਕੱਢ ਦੇ। ਛੇ ਗੁਰੂਆਂ ਦੀ ਬਾਣੀ ਰੱਖਾਂ। ਸੇ ਨੇ ਰੈਤ ਬੜਿਆ ਦਾ ਤੇ ਦਸ ਕੁਤ ਨਹੀਂ ਸੀ ਕੀਤਾ। ਨੇ ਵੀ ਪਰ ਮੱਤੇ ਖਲਾਸ ਦਾ ਇਹ। ਅਕਿੰਕੰਦੇ ਸਾਈਂ ਜੀ ਹਾਂਜੀ ਠੀਕ ਹੈ ਜੀ ਅੰਤ ਸਹਿਸਾ ਕਦੇ ਨਾ ਚੁੱਕੇ ਬਿਨ ਸ਼ਬਦੈ ਪਾਏ ਇਹ ਦੁੱਖ ਪਾਏ ਸ਼ਬਦ ਤੇ ਬਿਨਾ ਦੁਖੇ ਪਾਊਗਾ ਉਪਦੇਸ਼ ਤੇ ਬਿਨਾ ਦੁਖੇ ਪਾਊਗਾ ਇਹ ਸਾਰੀਆਂ ਗੱਲਾਂ ਰਿਲੇਟਡ ਗੁਰਬਾਣੀ ਨਾਲ ਨੇ ਠੀਕ ਹੈ ਜੀ ਆ ਕੋਈ ਸ਼ਬਦ ਨਾਲ ਅਸੀਂ ਟੁੱਟੇ ਕਿਉਂ ਨਾ ਕੋਈ ਕਾਰਨ ਪਿੱਛੇ ਟੁੱਟਦਾ ਜਿਵੇਂ ਅਰਥ ਕਰਦੇ ਨਾ ਮਿਲ ਆਉਂਦੇ ਕੱਖ ਦੀ ਬੱਲੇ ਬਣ ਲੋਕਾਂ ਦੀ ਇਹ ਵੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕੰਮ ਭਾਵੇਂ ਕੱਟ ਲੱਗੇ ਵੱਧ ਲੱਗੇ। ਪਰ ਸਾਡੇ ਜੀਤਦਾ ਕੋਈ ਠੀਕੇ ਵਾਲਿਆਂ ਨੇ ਰੱਖਦੀ ਬੱਲੇ ਪੈਦਾ। ਕਾਮ, ਸਬਲਾ ਨਿਰਧੰਦਾ ਕਰਤ ਵਿਹਾਈ। ਕਾਮ, ਕ੍ਰੋਧ, ਲੋਭ ਇਹ ਕੱਦਾ ਇਹ ਤਜਾ ਬਣਾਇਆ ਹੈ। ਕਰਮਾਂ ਦੇ ਤੱਕ ਦਾ ਵੀ ਇਹ ਕ੍ਰੋਧ, ਵੀ ਇਹ ਲੋਭ, ਵੀ ਇਹ 뭐 ਵੀ ਹੈ। ਉਹ ਵੀ ਹੈ। ਧਰਮ ਕਿਤੇ ਆ ਜਾਂਦਾ ਤਾਂ ਤਬੜਨਗੇ। ਸੰਭਾਗ ਹਰਤ ਬਿਹਾਈ ਠੀਕ ਹੈ ਜਿਹਦੇ ਨਾਲ ਹੀ ਗੁਜ਼ਰਦੀ ਹੈ ਹਮ ਹਮ ਸਬਲਾ ਤੋਂ ਭਾਵ ਕੀ ਹੈ ਜੀ ਆ ਕਾਮਕਰ ਸਾਰਾ ਉਹ ਸ਼ਕਤੀ ਗੱਲ ਹੀ ਹੈ ਸਬਲਾ ਹੈ ਬਲਵਾਨ ਹੈ ਅੱਛਾ ਜੀ ਅਜੇ ਕੋਈ ਵੀ ਤਬਦਲ ਨਹੀਂ ਹੈ ਹਮ ਹਮ ਤਰਵਾਨ ਠੀਕ ਗੁਰਾਂ ਦੇ ਗੁਰਗਣ ਨੇ ਗੁਰਾਂ ਦੇ ਪੈਰੇ ਵੀ ਛੜਦੇ ਨੇ ਸਭ ਨੂੰ ਗੁਰਾਂ ਦੀ ਫੌਜ ਧਰਮ ਕਰਮ ਕੋ ਗੁਰਾਂ ਸਾਹਮਣੇ ਬਲਵਾਨ ਹੈ ਠੀਕ ਹੈ ਜੀ ਚਰਨ ਕਰ ਦੇਖਤ ਦੇਹੇ ਨੇੜੇ ਆਏ ਯਾਰਾ ਨਾ ਕਰਦੇ ਤੋਕਸਤੇ ਤੇ ਮੁਕੇ ਦੇਲੇ ਦੇ ਮੁਕੇ ਨੇੜੇ ਅੱਗੇ ਪੈਰ ਨਾਲ ਚੜਨ ਕਹੀ ਜਾਂਦੇ ਨੇ ਆ ਜਿਹੜੇ ਸੁਤਾਨਾ ਤਾਇਆ ਲਈ ਇਹਾਰੇ ਦਰਸ਼ਨ ਕਰਦੇ ਰਹੇ ਇਹਨਾਂ ਦੀ ਧੂੜ ਝੜਦੇ ਰਹੇ ਇਹਨਾਂ ਦੇ ਪੌੜੇ ਤੇਰੇ ਬੁੱਕੇ ਜਿੱਦਗੀ ਜਲ ਗਈ ਨੇੜੇ ਆ ਗਏ ਹਮਨ ਸਾਥੇ ਬਿੜਿਆ ਕੁੱਤਰੀ ਸੱਚਾ ਨਾਮ ਨਾਲ ਲੱਗੋ ਮਿੱਠਾ ਜਿਤ ਨਾਮ ਨਵਨੀ ਦੀ ਪਾਏ ਸੱਚਾ ਨਾਮ ਨਾਲ ਲੱਗੋ ਮਿੱਠਾ ਸੱਚਾ ਨਾਮ ਤਾਂ ਮਿੱਠਾ ਲੱਗਿਆ ਹੀ ਨਹੀਂ ਚੱਲ ਨਾ ਹੁਦੈ ਨਹੀਂ ਕੈਲਾਦੇ ਅਰਥ ਹੋਰ ਇਹ ਪੈਰ ਉਹ ਚਰਨ ਚੜਾ ਜੇ ਲੋ ਮਾਰ ਗੋਬਿੰਦ ਪਿਤਾ ਪਾਪ ਜਥੀ ਇਹ ਹਰ ਬਿੰਦ ਪੈਰਾ ਬਾਜੋਂ ਚੱਲਣਾ ਪੈਰਾਂ ਤੇ ਬਿਨਾ ਚੱਲਣਾ ਚਰਨ ਚਲੋ ਮਾਰ ਗੋਬਿੰਦ ਇਹ ਚਰਨ আর ਅਲੱਗ-ਅਲੱਗ ਦੇ ਪੈਰਾਂ ਨਾਲ ਚਰਨ ਸੰਪੇ ਦੇਰ ਦੇ ਕੇ ਸਾਰੀ ਜ਼ਿੰਦਗੀ ਥੱਕ ਗਏ ਪੂਜ-ਪੂਜ ਕੇ ਪੈਰ ਧੋਤੋ ਕੇ ਸੰਤਾਂ ਦੇ ਲਾਹ ਕਹੀ ਹੋਈ ਆ ਅਸਾ ਚਰਨ ਕਰਦਾ ਮਤਲਬ ਇੱਥੇ ਕਰ ਹੱਥ ਨਹੀਂ ਹੈ ਦੂਸਰੇ ਵਾਲੇ ਚਰਨ ਕਰ ਹੱਥ ਨਾਲ ਲਗਾਦਾ ਹਨ ਜੀ ਚਲਣ ਵੀ ਜੇ ਤਰਮਾ ਨੇ ਠੀਕ ਹੈ ਜੀ ਫਿਰ ਕਰ ਹੱਥ ਚਰਨ ਇਹ ਦੇਖਦੇ ਇਹਨਾਂ ਦੇ ਦੇਖਦੇ ਇਹਨਾਂ ਦੇ ਦਰਸ਼ਨ ਹੁੰਦੇ ਰਹੇ ਨੇ ਔਰ ਗਾਦੇ ਹੋਦੇ ਨੇ ਇਹਨਾਂ ਨੂੰ ਦੇਖਦੇ ਵੀ ਰਹੇ ਨੇ ਅੱਖਾਂ ਨਾਲ ਥੱਕ ਕੇ ਦਿਨ ਮੁਕਤੇ ਮਾੜਾ ਜਿਹੜਿਆ ਗਿਆ ਨਹੀਂ ਆ ਕੁਝ ਵੀ ਅੱਗੇ ਗੁਰਮਖਾਰੀ ਬਖਸ਼ੇ ਤਾਂ ਹੀ ਸ਼ੁਰੂ ਹੋਈ ਹੈ ਨਾ ਠੀਕ ਹੈ ਜੀ ਬੱਚਿਆਂ ਆਵਾ ਜੇ ਸਾਡ ਤੁਹੇ ਦੱਸੇ ਕਿ ਸਾਬੇ ਹਾਂ ਜੀ ਲੱਗੇ ਤੇ ਦੂਵੇ ਜਾਣ ਕਿਸਾਨ ਕਹੋ ਵੀ ਇਹ ਚਾਰ ਮਹੀਨੇ ਹੋ ਗਏ ਲੱਗੇ ਹਾਂਜੀ ਸੱਚਾ ਨਾਮ ਨਾਲ ਲੱਗੋ ਮਿੱਠਾ ਜਿਤ ਨਾਮ ਮਨਵਨੀਦੀ ਪਾਏ ਉਹ ਨਾਮ ਨਾਲੇ ਲੋਨਦੀ ਪੌਂਦੀ ਉਹ ਭਾਵਤਾ ਮਿੱਠਾ ਲੱਗਿਆ ਜੀ ਅਮਨੇ ਦੀ ਲੋਕ ਜਾਨਣਾ ਸੀ ਜਿਹੜਾ ਆ ਵੀ ਇੱਕੋ ਲਿਖਿਆ ਹੋਊਗਾ ਤੁਹਾਡੇ ਦੇਖ ਲਿਓ ਕੋਤਾ ਨਹੀਂ ਕਿਹਾ ਸਰਦਿ ਗਰਾਮਪੁਰ ਇੱਕ ਵਜਨ ਕਹਿਣਾ ਜਿਵੇਂ ਸਿਆਰੀ ਹੋਵੇ ਇਸਦੀ ਨੇ ਲਾਹ ਹਜ਼ਰ ਕਰੂਗਾ ਠੀਕ ਹੈ ਜੀ ਜੇ ਨਾਮ ਨਵਨਦੀ ਪਾਇ ਇਹਦੇ ਨਾਮ ਨਵਨਦੀ ਆ ਰੋਮਾ ਕੰਲਾ ਮਿਲਣਾ ਸੀ ਦੇਜਾ ਖਿਆਨਾ ਨਵਾਂ ਆਇਆ ਹੈ ਇਹ ਵਰਲਡ 'ਚ ਦਿਖਾਓ ਕਿੱਥੇ ਅਸੀਂ ਅੱਜ ਵੀ ਦਿਖਾਓ ਵਰਲਡ 'ਚ ਕਿੱਥੇ ਹੈ ਇੱਥੇ ਆਲਾ ਅੱਜ ਵੀ ਨਵਾਂ ਆਇਆ ਹੈ ਆਦਮੀ ਦੱਸਿਆ ਜਿਹੜੇ ਕੋਹ ਹੋਵੇ ਦਿਖਾਵੇ ਕਿੱਥੇ ਠੀਕ ਹੈ ਜੀ ਨਵਨਦੀ ਅਮਰੋ ਪ੍ਰਭ ਦਾ ਨਾਮ ਦੇਹੀ ਮੇਸਕ ਦਾ ਜਦਵੇਂ ਮਰਦਾ ਨਾ ਮਾ ਹੁੰਦਾ। ਆਜ ਵੀ ਦਿਖਾਉਣ ਦੇ ਇਥੇ। ਸਾਦ ਕਰਕੇ ਦਿਖਾ ਦੇ ਕੋਈ ਵਰਡ ਦੇ ਵਿੱਚ। ਠੀਕ ਹੈ ਜੀਵਤ ਮਰੇ ਮਰੇ ਫੁਨ ਜੀਵੇ ਤਾਂ ਲੈਵਲ ਤੇ ਆ ਚੱਲ ਆ ਆਦਰੀ ਮੁਕਤੀ ਜਾਨਦੀ ਆ ਬਾਦਰੀ ਮੁਕਤੀ ਹੁੰਦੀ ਮੁਕਤੀ ਜਾਨੀ ਜਿਸਨੂੰ ਪਤਾ ਲੱਗਦਾ ਇਹਨੂੰ ਗੁਜ਼ਰੀ ਹੋਰ ਪਤਾ ਹੁੰਦਾ ਸਾਹਮੋਖਨ ਕਰ ਪਾਏ ਠੀਕ ਜਿਹੜਾ ਬਾਗ ਦਾ ਮੁੱਖ ਹੈ ਨਾ ਹਾਂਜੀ ਕੋਈ ਨਹੀਂ ਰਹਿੰਦਾ 7 ਵਜੇ ਚੋਕਾਈ ਰਹ ਜਾਂਦਾ ਬਸ ਇਹਦਾ 7 ਵਜੇ ਕਹਾਂ ਜੋਗਾ ਹੀ ਰਹ ਜਾਂਦਾ ਉਹਨੇ ਕੁਝ ਕਹਿ ਸਕਦਾ ਹੈ ਇਹ ਹੋਵੇਗੀ ਸੱਤ ਬਚਨ ਉਹ ਕ ਅਫਦਲ ਮੁਖੋ ਜਨਾਂ ਵਾਂਗ ਕੁਦੇ ਇਹ ਤਾਂ ਰੋਟੀ ਪਾਣੀ ਖਾਣ ਪੀਣ ਜੋਗਾ ਹੀ ਰਹਿ ਜਾਂਦਾ ਹੈ ਕਿਉਂ ਸੱਤ ਬਚਨ ਠੀਕ ਹੈ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮਾਂ ਗਿਆ ਪਾਇਆ ਸਤੁਰ ਤੋਂ ਤੇਰੇ ਤੇ ਕਰਪਾਈ ਨਹੀਂ ਪਰਮੇਸ਼ਰ ਦੇ ਦਰੋਂ ਹੋਈ ਬਿਨ ਕਰਮਾਂ ਗਿਆ ਪਾਇਆ ਜਾ ਬਿਨ ਕਰਮਾਂ ਦੇ ਕਿੱਥੋਂ ਪ੍ਰਾਪਤੀ ਕਰ ਲੈ ਪ੍ਰਾਪਤੀ ਤਾਂ ਦੇ ਦਰਗਾਂ 'ਤੇ ਹੋਣੀ ਸੀ ਲੋਭ ਦੀ ਉੱਤੇ ਦਾ ਤੇ ਰਖ ਲੈ ਕਿਤੇ ਉਹ ਆ ਦਾ ਦਾ ਉਗਰੋਤੀ ਆਇਆ ਖੜੇ ਅਦਾਬ ਤਾਂ ਡੁਪਲੀਕੇਟ ਬਣਾਈ ਖੜੇ ਉਹਦਾ ਹੱਕਮ ਚੱਲਦਾ ਦੁਕਾਨਾ ਮੇਰਾ ਚੱਲਦਾ ਮੇਰੇ ਘਰੇ ਤੇ ਕੁਝ ਹੁੰਦਾ ਉਥੋਂ ਦਾ ਬਾਗੀ ਐ ਬਾਗੀ ਕੱਲੋਂ ਪੈਸੂ ਆ ਕੀ ਹੋਇਆ ਖੜੇ 500 ਦਾ ਆ ਕੀ ਹੋਇਆ ਬੜਾ ਨਕੀ ਹਾਂ ਕੱਲੋਂ ਠੀਕ ਹੈ ਜੀ ਗੁਰਕਾ ਸ਼ਬਦ ਸੰਭਾਲ ਤੂੰ ਮੂੜੇ ਗੱਤ ਮੱਤ ਸ਼ਬਦੇ ਪਾਏ ਲਿਖਿਆ ਹੋਇਆ ਠੀਕ ਹੈ ਜੀ ਮੱਤ ਮਾਟੇਂ ਦਾ ਬਿਤਰਾਂ ਤੇ ਅੱਛਾ ਜੀ ਮੱਤ ਹੋਣਾ ਚਾਹੀਦਾ ਅੱਤਨੇ ਸਤੂ ਬਾਣੀ ਦਾ ਠੀਕ ਹੈ ਜੀ ਅੱਤਨੇ ਅੱਤਨੇ ਰਹਾ ਹੁਦਾਂ ਮੱਤੇ ਉਹ ਨਹੀਂ ਠੀਕ ਹੈ ਜੀ ਗੁਰਕਾ ਸ਼ਬਦ ਸਮਾਲਤੂ ਮੂੜੇ ਗਤ ਮਤ ਸ਼ਬਦੇ ਪਾਈ ਗੁਰਕਾ ਸ਼ਬਦ ਸਮਾਲਤੂ ਮੂੜੇ ਗੁਰਕਾ ਸ਼ਬਦ ਸਮਾਲੇ ਗੁਰਕਾ ਸ਼ਬਦ ਵਿਚਾਰੇ ਤੇਰੀ ਮਤਬ ਦੇ ਬਦੂ ਕੀ ਆਵਾ ਤਾਉ ਵੀ ਗੁਰ ਕੀ ਆਣੇ ਪਾਈ ਅਰਮਤ ਪਾਈ ਹਾਂਜੀ ਗੁਰ ਕੀ ਮੱਤ ਤੋਂ ਲਿਓ ਆਣੇ ਤਾਂ ਜਿ ਬਿਨਾ ਮੋ ਡੁੱਬੇ ਸਿਆਣੇ ਨਾਨਕ ਸਤਗੁਰ ਤਦ ਹੀ ਪਾਏ ਚਾ ਆਪ ਗਵਾਏ ਆਹ ਤਾਂ ਤਦ ਹੀ ਪਾਏ ਚਾ ਆਪ ਗਵਾਏ ਉਹਨੇ ਕਹਿਆ ਸਤਗੁਰ ਇਹ ਆਪਣਾ ਆਪ ਖਾਰਜ ਕਰ ਦੇਵੇ ਆਪਣਾ ਨਾਮ ਨੂੰ ਖਤਮ ਕਰ ਦੇਵੇ ਮੈਂ ਹਣੀ ਕੋਣ ਆਏ ਤਾਂ ਆਪਣੀ ਮਰਜ਼ੀ ਖਤਮ ਕਰ ਦੇਵੇ ਖਤਮ ਕਰ ਦੇਵੇ ਸਤਿਗੁਰੂ ਨੇ ਮਰਜ਼ੀ ਤੇਰੀ ਮਰਜ਼ੀ ਠੀਕ ਤੇਰੀ ਮਰਜ਼ੀ ਨਹੀਂ ਕੋਈ ਹਾਂਜੀ ਠੀਕ ਤੇ ਹੋਇਆ ਹਾਂਜੀ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ ਤਿਸ ਨੂੰ ਕਿਉਂ ਅਦੇਸਾ ਕਿਸੇ ਗੱਲੇ ਦਾ ਲੋੜੀ ਹੈ ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ ਇਹਤ ਵਸਿਆ ਮੇਰਾ ਸਵਾਮੀ ਜੀ ਮੇਰੇ ਸਵਾਮੀ ਦੱਸ ਗਿਆ ਤਿਸ ਕਿਉਂ ਅਦੇਸਾ ਕਿਸੇ ਗੱਲੇ ਲੋੜੀ ਹੈ ਕਿਸੇ ਗੱਲ ਤੇ ਸ਼ਰਤਾਂ ਕਰਦੀ ਕੀ ਲੋੜ ਹੈ ਕੁਰਬਾਨੀ ਦੀ ਕਿਸੇ ਗੱਲ ਤੇ ਸੁਰਤਾ ਕਰਨ ਦੀ ਕੀ ਲੋੜ ਐ ਉਹ ਨੂੰ ਜਿਹਦੇ ਕਿਥੇ ਵਿੱਚ ਕੁਰਬਾਨੀ ਦਾ ਗਿਆਨ ਬਸ ਗਿਆ ਸਭ ਆ ਗਈ ਠੀਕ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆਂ ਕਿਉ ਨਿੰਮਖ ਕੜੀ ਮੂੰਹ ਹਰ ਸੁਖ ਹਰ ਦਾ ਸੁਖ ਦਾਤਾ ਸਭਨਾ ਗੱਲਾਂ ਦਾ ਸਾਰਿਆਂ ਦਾ ਨਾ ਸੁਖ ਦਾਤਾ ਤੇ ਸਮਉਂ ਤੇ ਆਈ ਆ ਧਿਆਨ ਦੇ ਆ ਕਿਉਂ ਬੇਵਖ ਦੇ ਵਿੱਚ ਤੇ ਆਂ ਕਰਕੇ ਜੁਆ ਰੱਖੀਏ ਕਿਸੇ ਤੁਹਾਡੀ ਧਿਆਨ ਉਹਦੇ ਵੱਲੋਂ ਇੱਕ ਦਿਨ ਵਾਸਤੇ ਵੀ ਵੱਲੋਂ ਕੀ ਕਾਰਨ ਅਰੀਦੱਲਾਾਰੇ ਸਾਰੇ ਸੁਖੋ ਦੇ ਕੋਲ ਨੇ ਤੇ ਆਂ ਨਟਾਉਣੋਂ ਜੇ ਤੇ ਦੁੱਖ ਚੁੜ ਜਾਣਗੇ ਠੀਕ ਹੈ ਜੀ ਹਰ ਵਿਖਰੇ ਤਾਂ ਖੁਆਰੀ ਹਰ ਵਿਸਰਿਆ ਖਵਾਰੀ ਸ਼ੁਰੂ ਜੇ ਹਰ ਵਿਸਰ ਨਾਲ ਖਵਾਰੀ ਹੈ ਕਦੇ ਹੋ ਜਾਈ ਤਦ ਤਵੇ ਮੂੰਹ ਕੋਲੂ ਮੂੰਹ ਕੋਲੂ ਘਰੀ ਠੀਕ ਹੈ ਜੀ ਜਿੰਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੂੰਹ ਜੋੜੀਏ ਉਹਦੇ ਸਾਰੇ ਪਾਸੇ ਕਲਿਆਣੇ ਕਲਿਆਣ ਉਹਦੀ ਕੋਈ ਤਕਲੀਫ ਨਹੀਂ ਹੋਈ ਹੋਈ ਇਹ ਤਸਲ ਤੇ ਜਾਨ ਇਹ ਸੰਬੱਧਤ ਜਾਇ ਰਹੀ ਹੈ ਉਹ ਜੋੜੀ ਹੈ ਉਹਦੇ ਤੇ ਹਸਲ ਨਾਲ ਸੰਬੱਧਤ ਵਿੱਚ ਆ ਕੇ ਬਹਿਦਾ ਉਹ ਜੋੜ ਕੇ ਬਹਿਦਾ ਉਹ ਔੜ ਕਹਦੀ ਬੈਨਦਾ ਜੋੜ ਕੇ ਬੈਨਦਾ ਠੀਕ ਹੈ ਜੀ ਖੋਜੀ ਉਹ ਜੋੜ ਕੇ ਬੈਨਦੇ ਨੇ ਵਿਦਵਾਨ ਉਹ ਔੜ ਕੇ ਬੈਨਦੇ ਰੱਖ ਦੂਏ ਠੀਕ ਹੈ ਆ ਉਹਦੀ ਗੱਲ ਨਹੀਂ ਕਾਹ ਕਾਣੀਆਂ ਚਾਹ ਕਾਸ਼ ਮੇਰੀ ਗਲਤ ਹੋਵੇ ਠੀਕ ਹੈ ਜੀ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਸਾਰੇ ਦੁੱਖ ਭੁੱਖ ਚਲੇ ਸਾਰੇ ਬੰਧਨ ਟੁੱਟ ਗਏ ਫੇਰ ਉਹ ਜੋੜ ਕੇ ਬੈਠੂਗਾ ਸੁਨਮਖੂ ਜੋੜ ਕੇ ਸਭਾ ਵਿਚਾਰੇ ਬੈਠਣਗੇ ਸ਼ਬਦ ਵਿਚਾਰ ਕਰਨਗੇ ਆਹ ਹਾਲਤ ਹੋ ਜੂਗੀ ਭੁੱਖ ਸਾਰੇ ਤੇ ਗਿਆਗੇ ਉਹ ਜੋੜ ਕੇ ਨੀਰੂ ਬੈਠੂ ਗੁਰੂੜ ਕੇ ਬੈਠਦੇ ਦੇਖਦੇ ਨੂੰ ਹਾਂਜੀ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾਖੇ ਜਗਤ ਤਰਿਆ ਸਭ ਲੋੜੀ ਹੈ ਹਰ ਦਰਬਾ ਦੇ ਹੋਆ ਭਗਤ ਆ ਗੱਲ ਇੰਪੋਰਟੈਂਟ ਬਹੁਤ ਜ਼ਿਆਦਾ ਹੂੰ ਹਰ ਬੰਦੇ ਫਾਇਦਾ ਕੀ ਹੋਇਆ ਆਪਣੀ ਪਰਜਾ ਹੋ ਗਿਆ ਉਹ ਲੋੜ ਸੀ ਹਰ ਨੂੰ ਪਤਾ ਸੀ ਵੀ ਆ ਸਮਾਂ ਤੁਹਾਰ ਵਖਤ ਪੈਜੋ ਹੁਣ ਬਹੁਤ ਸਾਰੀ ਫਸਲ ਹੈ ਯਾਰ ਕੋਈ ਜਮਈ ਹੋਈ ਹੈ ਕੋਈ ਜਮਣ ਵਾਲੀ ਹੈ ਕੋਈ ਖਾਸੀ ਵੱਡੀ ਵੱਡੀ ਹੈ ਗਲਤ ਰਸਤੇ ਪਈ ਹੋਈ ਹੈ ਹੁਣ ਵਾਦਿਓ ਸਾਂਭ ਲੋ ਪਰ ਕਿਰਪਾ ਹੈ ਹਰ ਭਗਤਾਂ ਹਰ ਦੀ ਕਿਰਪਾ ਹੈ ਹਰ ਭਗਤ ਪੈਦਾ ਹੋਣਾ ਆਪਣੇ ਆਪ ਨਹੀਂ ਕੋ ਪੈਦਾ ਹੋ ਸਕਦਾ ਇਹ ਤਾਂ ਉਹਦੀਆਂ ਗੱਲਾਂ ਉਹ ਜਾਣਦਾ ਠੀਕ ਹੈ ਜੀ ਹਰ ਕਿਰਪਾ ਨੇ ਹਰ ਵਕਤ ਹਰ ਕਿਉਂ ਹੋ ਰਹਾ ਹੋ ਠੀਕ ਹੈ ਜੀ ਹਰ ਭਗਤ ਜਨਾ ਕੇ ਮੂੰਹ ਡਿੱਠਾ ਹਰ ਭਗਤ ਜਨਾ ਦਾ ਜੇ ਮੂੰਹ ਦੇਖਦੇ ਨੇ ਲੋਕ ਵੀ ਕੀ ਬੋਲਦਾ ਸਭ ਜਗ ਤਰਿਆ ਜਗ ਤੇ ਉਹਨਾਂ ਦਾ ਲੱਗ ਤੁਰਦਾ ਜੋਰ ਆ ਜਾਣ ਚਾਹੇ ਪੱਥਰ ਦੇ ਬੰਨਾਂ ਵਾਲੇ ਯਾ ਦੇ ਪੱਥਰ ਦੇ ਪੱਲੇ ਟੁੱਟ ਗਿਆ ਆ ਚੇਕਰ ਲਾਉਂਦੇ ਨੇ ਆਣੇ ਟੁੱਟ ਜਾ ਲੋਕਾਂ ਨੂੰ ਬਾਗਦੇ ਆ ਵੀ ਥੈਲੇ ਥੈ ਸੰਢ ਕੇ ਆ ਰੇਤ ਦੇ ਬੰਦ ਕਰੋ ਸਰਪੰਦ ਉਹ ਚੀਤੀ ਦਿਓ ਇਹ ਕਈਆਂ ਲੱਗੇ ਭਈ ਟੁੱਟ ਗਿਆ ਆ ਸਭ ਕੁਛ ਪਾਖੜਾ ਤਾਂ ਉਹਨੇ ਤਾਂ ਕਵੀ ਇਹਨਾਂ ਦਾ ਬਚਣਾ ਤਾਂ ਆਰਮਤ ਕੋਨੈਕਸ਼ਨ ਤੋਂ ਰੋਗ ਭਾਰ ਮਿਲ ਮਿਚ ਪਤਾ ਇਹਨੇ ਗੱਲ ਕੇ ਲੈਣ ਲੱਗੀ ਤਾਂ ਬਸ ਤੋ ਬੁਰਾ ਟਾਈਮ ਅੱਜ ਜਨਮ ਮੁਖਾਂ ਤੇ ਕਿਸੇ ਵੇਲੇ ਬੁਰਾ ਟਾਈਮ ਗੁਰਮੁਖਾਂ ਤੇ ਵੀ ਹੁੰਦਾ ਉਹਦਾ ਵੀ ਬੁਰਾ ਸੁਭਿ ਤੇ ਉਹਦਾ ਹੰਕਾਰੇ ਸੁਭਿ ਅੱਜ ਜਨਮ ਤੇ ਅਦੁਰਮਤ ਦੇ ਖਿਲਾਫ ਸਾਰੀ ਵਰਡ ਹੈ ਅਜੋ ਪੜਣਾ ਸਮਾਂ ਫਰੇ ਨਹੀਂ ਆਇਆ ਆਇਆ ਹੋਊ ਭੈਣੋ ਜਿਹੜੇ ਬਤਾਰਾ ਦੇ 10 ਉਤਾਰ ਹੁੰਦੇ ਨੇ ਤੋਂ ਆਇਆ ਹੋ ਪਰ ਅੱਜ ਬਹੁਤ ਪੜਣਾ ਸਮਾਂ ਨਾਲ ਰੁਕ ਪਰੇ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ